ਦੱਖਣੇ ਮਹੱਲਾ ਪੰਜਵਾਂ ਮੁੱਖੋਂ ਅਲਾਈ ਹਬ ਮਰਨ ਪਛਾਣ ਦੋ ਕੋਏ ਨਾਨਕ ਤਿਨਾ ਖਾਕ ਜਿਨਾ ਯਕੀਨਾ ਹਿਕ ਸਿਉ ਮੁੱਖੋਂ ਅਲਾਈ ਅਲਾਈ ਹਬ ਉਹ ਤਾਂ ਸਾਰੇ ਕਹਿੰਦੇ ਨੇ ਬੋਲਦੇ ਨੇ ਅਲੋਣਾ ਬੋਲਣਾ ਮਰਣਾ ਪਛਾਣ ਦੋ ਕੋਏ ਮਰਣਾ ਕੋਈ ਪਛਾਣਦਾ ਵਰਨਾ ਬੜਾ ਕਿਵੇਂ ਦੇਖੋ ਤੁਸੀਂ ਸਾਰੀ ਮਾਰਨ ਦੀ ਗੱਲ ਨਹੀਂ ਹੈ ਵਰਨਾ ਕੀ ਹੈ ਕਿਵੇਂ ਮੁਕਤੀ ਹੋਈ ਵਰਨਾ ਸੱਚ ਮੁਕਤੀ ਦੀ ਸੋਝੀ ਕਿਸੇ ਨੂੰ ਆਉਂਦੀ ਹੈ ਜੀਵਨ ਬਰਲਣਾ ਕਿਸੇ ਨੂੰ ਆਉਂਦਾ ਕਿਸੇ ਨੂੰ ਸਮਝ ਆਉਂਦੀ ਹੈ ਜੀਵਨ ਬਰਲਣ ਦੀ ਹੁਣ ਜੇ ਆਪਾਂ ਮਾਰਨ ਪਛਾਣਨ ਉਹ ਲਿਖੀ ਤੁਸੀਂ ਗੱਲਬਾਤ ਕਰਦੇ ਹੁੰਦੇ ਹੋ ਉਹਨਾਂ ਨਾਲ ਜਿਹੜੇ ਮਰ ਗਏ ਉਹਨੇ ਕੀ ਪਛਾਣਨਾ ਬਰੇ ਤੋਂ ਬਾਅਦ ਦੱਸੋ ਕੀ ਪਛਾਣੂ ਕੀ ਪਛਾੜੂ ਜਿਉਂਦਾ ਹੀ ਪਛਾਣੂ ਬੰਨ ਹਾਂਜੀ ਹਾਂਜੀ ਠੀਕ ਹੈ ਅਲਾਇਦਾ ਮਤਲਬ ਮੁਕਤੀ ਦੀਆਂ ਗੱਲਾਂ ਕਰਦੇ ਹਾਂ ਮੁਖੋਂ ਲਾਇ ਹੱਬ ਆਹੋ ਗੱਲਾਂ ਕਰਤਾ ਨੇ ਮੁਕਤੀ ਦੀਆਂ ਸਾਰੇ ਕਹ ਹੈ ਸਾਰੀ ਆਨੰਦ ਅਨੰਦ ਕਹ ਸਭ ਕੋ ਠੀਕ ਹੈ ਜੀ ਇਹ ਰਾਮ ਕਰਦਾ ਸਭ ਜੱਗ ਫੇਰੇ ਹਾਂਜੀ ਹਾਂਜੀ ਮੁਖੋਂ ਤਾਂ ਸਾਰੇ ਕਹਿੰਦੇ ਆ ਪਰ ਕਿਸੇ ਨੂੰ ਸੋਝੀ ਹੋਈ ਇਸ ਗੱਲ ਦੀ ਹਾਂਜੀ ਹਾਂ ਸੋਝੀ ਬਿਲਲੇ ਰੁਹਦੀ ਐ ਕੋਈ ਇੱਛਾ ਹੋ ਜੀ ਹੈ ਤਾਂ ਸੋਝੀ ਹੋ ਜਾਂਦੀ ਜੇ ਮੈਂ ਉਲਟਾ ਰ ਫੜ ਲਿਆ ਮੈਂ ਫਿਰ ਛੱਡਣਾ ਹੀ ਨਹੀਂ ਉਲਟਾ ਸੋਝੀ ਹੋ ਵੀ ਜਾਵੇ ਉਹਦਾ ਕੋਈ ਇਲਾਜ ਨਹੀਂ ਹੈ ਅੰਦਰ ਸੋਝੀ ਦੀ ਗਿਆਨਵਾਨ ਬਣਨ ਦੀ ਇੱਛਾ ਸੀ ਬਈ ਮੇਰੀ ਬਝੂਰੀ ਹੋ ਜਵੇ ਮੈਨੂੰ ਲੋਕਾਂ ਚ ਵੇਚ ਕੇ ਆ ਉਹ ਬਣ ਗਈ ਉਹ ਜੇ ਬਦਲਦਾ ਸੱਚ ਨੂੰ ਬਦਲਦਾ ਫਿਰ ਉਹ ਸਮਝਦਾ ਵੀ ਮੈਨੂੰ ਕਹਣਗੇ ਵੀ ਇਹ ਤਾਂ ਪਹਿਲਾਂ ਭਈ ਤੇ ਸੀ ਠੀਕ ਹੈ ਨਾਨਕ ਤੈਨਾ ਖਾਕ ਜਿਨ੍ਹਾਂ ਯਕੀਨਾ ਇੱਕ ਸਿਉ ਨਾਨਕ ਤੈਨਾ ਖਾਕ ਜਿਨ੍ਹਾਂ ਯਕੀਨਾ ਇੱਕ ਸਿਉ ਜਿਹੜੇ ਇੱਕ ਦੇ ਨਾਲ ਜੁੜ ਗਏ ਉਹਨਾਂ ਦਾ ਸਰੀਰ ਵੀ ਬੰਨ੍ਹਉ ਠਾਈ ਪੋਟੜੀ ਹੋਇਆ ਫਿਰ ਉਹ ਜਿਉਂਦੇ ਹੀ ਖਾਕ ਨੇ ਉਹ ਕਹਿੰਦੇ ਨੇ ਆ ਜਿਹੜਾ ਸਰੀਰ ਹੈ ਬੰਨ੍ਹਉ ਠਾਈ ਪੋਟੜੀ ਕਿੱਥੇ ਵੰਜਾ ਰਸਤ ਇਹਨੂੰ ਕਿੱਥੇ ਲਿਆ ਕੇ ਸੱਟਣਾ ਇਹ ਵੀ ਦੱਸਦੇ ਹੁਣ ਹਾਂਜੀ ਮਹੱਲਾ ਪੰਜਵਾਂ ਜਾਣ ਵਸੰਦੋ ਮੰਝ ਪਛਾਣੂ ਕੋ ਹੇਕੜੋ ਤੈ ਤਨ ਪੜਦਾ ਨਾਨਕ ਜੈ ਗੁਰ ਜਾਣ ਵਸੰਦੋ ਮੰਝ ਇਹ ਤਾਂ ਸਾਰੇ ਕਹਿਣ ਨੇ ਅੰਦਰ ਬਾਸ ਦਾ ਦਰਵਾਜ਼ਾ ਕਹਿੰਦਾ ਜਾਣਦੇ ਨੇ ਸਾਰੇ ਚਲੋ ਮੰਨਦੇ ਨੇ ਜਾਣਦੇ ਨਹੀਂ ਮੰਨਦੇ ਨਹੀਂ ਪਛਾਣੂ ਕੋ ਹੇਕੜੋ ਕੋ ਪਛਾਣਦਾ ਕੋਈ ਵਿਲਿਆ ਜਾਣਨ ਜਾਣ ਕੇ ਮੰਨ ਲੈਣਾ ਹੋਰ ਗੱਲ ਐ ਪਛਾਣਨ ਨੂੰ ਹੋਰ ਗੱਲ ਐ ਪਛਾਣੂ ਜੇ ਸਾਹਮਣੇ ਪਹੁੰਚੂ ਜਾ ਕੇ ਜੇ ਜਾ ਕੇ ਤੇ ਪਹੁੰਚੇ ਨਹੀਂ ਪਛਾਣਨ ਨੂੰ ਕੀ ਐ ਇਹ ਤੋਂ ਆਪਣੇ ਦਰਬਾਰ ਨਾਲ ਸੇਣੀ ਕਰਕੇ ਦੇਖਿਆ ਹੀ ਨਹੀਂ ਪਛਾਣਨਾ ਕੀ ਐ ਸਰ ਜੀ ਤੈਂ ਤਨ ਪਰਦਾ ਨਾਹੀਂ ਜੈ ਗੁਰ ਭੇਟਿਆ ਐ ਤਾਂ ਸਰੀਰ ਤੇ ਕੋਈ ਪਰਦਾ ਦੀ ਪਾਇਆ ਹੋਇਆ ਉਹ ਪਰਦੇ ਤਾਂ ਮੇਰੇ ਤੇ ਤੇ ਦੇ ਪਏ ਹੋਏ ਮੇਰੀ ਅੱਖ 'ਚ ਪਰਦਾ ਹੈ ਪਰਮ ਦਾ ਤੇਰੇ ਤੇ ਪਰਦਾ ਵੀ ਕੋਈ ਐ ਤਨ ਪਰਦਾ ਨਹੀਂ ਨਾਨਕ ਜੈ ਗੁਰ ਭੇਟੀ ਹੈ ਜੇ ਕਹਿੰਦੇ ਗਿਆਨ ਮਿਲ ਜਵੇ ਨਾ ਗਿਆਨ ਦਾ ਸਰਬ ਗਿਆਨ ਹਜੜ ਗੁਰਦੀਆ ਪਰ ਅਗਿਆਨ ਨੇ ਇਹ ਬਨਾਸ ਹੋ ਜਾਂਦਾ ਉਹੜਾ ਪਰਦਾ ਨਾ ਆਪਣੇ ਅੰਦਰ ਅੱਖ 'ਚੋਂ ਦੂਰ ਹੋ ਜਾਂਦਾ ਤੇਰੇ ਤੇ ਪਰਦਾ ਨਹੀਂ ਪਰਦਾ ਮੇਰੀ ਅੱਖ 'ਚ ਪਰਮ ਮੇਰੀ ਅੱਖ 'ਚ ਤਾਂ ਦੀ ਦੀਦਾ ਆਜਾ ਧਿਆਨ ਮੜ ਗਿਆ ਪੇਟ ਲਿਆ ਜਾ ਅੱਖ ਚ ਪੈ ਗਿਆਨ ਦਾ ਸਰਮ ਪਰਦਾ ਚੱਕਿਆ ਵੇਰਾ ਹੀ ਪਰਦਾ ਚੱਕ ਹੋਇਆ ਤੇਰੇ ਤੇ ਤਾਂ ਥਾ ਹੀ ਨਹੀਂ ਪਹਿਲਾਂ ਹੀ ਪਰਦਾ ਹਾਂਜੀ ਮਹੱਲਾ ਪੰਜਵਾਂ ਮਤੜੀ ਕਾਂਡਕ ਆਹ ਪਾਉਂ ਤੋ ਵੰਦੋ ਪੀਵਸਾਂ ਮੂਹ ਤਨ ਪ੍ਰੇਮ ਅਥਾ ਪਸਣ ਕੁ ਸੱਚਾ ਤਣੀ ਜਿਹੜੇ ਚਰਨ ਚਰਨ ਗੁਰ ਕੇ ਧੋਏ ਧੋਏ ਪੀਤੇ ਤੇ ਹੀ ਪ੍ਰਗਟ ਹੋਣੀ ਕਿਹੜਾ ਨਿਕਲਣੀਆਂ ਮੱਤ ਜਿਵੇਂ ਕੋਈ ਕਿਸੇ ਚੀਜ਼ ਤੇ ਹੁੰਦਾ ਨਾ ਬੈਲ ਲੱਗੀ ਹੋਈ ਬੈਲ ਲਾ ਦੀਏ ਬੋਲ ਬੈਲਾ ਲਾ ਦੀਏ ਤੇ ਵਿਚੋਂ ਜਿਹੜਾ ਨਿਕਲਣਾ ਉਹ ਸਾਕਿਦ ਕਲਣਾ ਉੱਪਰ ਆ ਜਿਹੜੀ ਲੱਗੀ ਹੋਈ ਹੈ ਨਾ ਮੈਂ ਕਹਿ ਲਉ ਕਸਤੂਰੀ ਤੇ ਹਿੱਗ ਵੇੜੀ ਹੋਈ ਹੈ ਜਿੰਕ ਲਾ ਲਓ ਕਸਤੂਰੀ ਦੀ ਮੈਂ ਕਾ ਪੁੱਥਲੋਂ ਕਸਤੂਰੀ ਨਿਕਲੇ ਹੋਣੀ ਮਾਇਆ ਦੀ ਮਹਿੜਾ ਇਹ ਤੋਤੀ ਜਾਣੀ ਹੈ ਗੁਰਬਾਣੀ ਤੇ ਗਿਆਨ ਨਾਲ ਗੁਰਬਾਣੀ ਦੀ ਸੋਝੀ ਨਾਲ ਠੀਕ ਹੈ ਮਾਇਆ ਵਾਲੇ ਖਰੀgende ਅਸੀਂ ਮਾਇਆ ਵਾਲੇ ਤਾਂ ਪਾਪ ਪਾਪ ਵੀ ਮਾਇਆ ਵਾਲੇ ਲੈ ਲੈਣ ਧੋਣੇ ਵੀ ਮਾਇਆ ਵਾਂਗੂ ਲੈ ਲੈ ਪੀੜੇ ਵੀ ਮਾਇਆ ਵਾਲੇ ਲੈ ਲਾਂਗੇ ਫਿਰ ਮਤ ਕਿੱਥੋਂ ਗੱਲ ਹੈ ਹੁਣੇ ਪਾਲੇ ਸ਼ਰੀਰ ਤੇ ਨਹੀਂ ਟਿਕਾਉਣੇ ਅਦਲੇ ਸ਼ਰੀਰ ਤੇ ਟਿਕਾਉਣੇ ਹਾਂਜੀ ਪਾਪ ਤੋਂ ਪੀਵਸਾ ਇਹ ਕਾਫੀ ਜਿਹੜੇ ਸੰਤ ਲੋਕ ਹੈ ਉਹ ਅਨਪੜ ਲੋਕਾਂ ਨੂੰ ਆਪਣੇ ਪੈਰ ਇਸ ਤਰ੍ਹਾਂ ਹੀ ਜਲ ਬਲਾ ਬਣਾ ਸਿਖਾਉਂਦੇ ਆਂ ਜੀ ਬੱਤ ਕਿਥੋਂ ਨਾਲ ਆਉਣੀ ਹੈ RAM RAMAT MAT ਪ੍ਰਗਟਈ ਮਤ ਤਾਂ ਪ੍ਰਗਟ ਹੋਣੀ ਅੰਦਰੋਂ ਨਿਕਲਣੀ ਆ ਉੱਤੇ ਬਹੁਤ ਬਿੱਟੀ ਜਮੈਂਾ ਪੜਦਾ ਪਾਇਆ ਹੋਇਆ ਮਤ ਪੜਦੇ ਵਾਲੀ ਗੱਲ ਜਿਹੜੀ ਉੱਪਰ ਆ ਉਹ ਪੜਦਾ ਗਿਆਨ ਨਾਲ ਲੈਣਾ ਹੈ ਪੜਦਾ ਉਹਦੇ ਤੇ ਪੜਦਾ ਨਹੀਂ ਹੈ ਜਿਹਨੂੰ ਅਸੀਂ ਦੇਖਣ ਪੜਦਾ ਦੇਖਣ ਵਾਲੀ ਬੁੱਧੀ ਸਿਆ ਹੈ ਜਿਹੜੀ ਬੁੱਧੀ ਦੇਖ ਰਹੀ ਹੈ ਆਤਮਾ ਸਾਡੀ ਸਾਡੇ ਅੰਦਰ ਹੈ ਤੁਹਾਨੂੰ ਵੀ ਫੇ ਪਰਦੇ ਸਤਗੁਰ ਖੋਲੇ ਸਤਗੁਰ ਹੋਵੇ ਖੋਲਦੇ ਨਹੀਂ ਕਿ ਆ ਖੋਲਦੇ ਨਹੀਂ ਨਾ ਤਾਂ ਰੱਬ ਜਾਣੇ ਕੀ ਗੱਲ ਹੈ ਵਿੱਚੋਂ ਜਿਹੜੇ ਇਸ ਤਰ੍ਹਾਂ ਪਾਣੀ ਪਲਾਉਂਦੇ ਆ ਉਹਨਾਂ ਸਾਰੇ ਨਿੰਦਦੇ ਐ ਪਰ ਜਿਹੜੇ ਨਿੰਦਦੇ ਨੇ ਉਹਨਾਂ ਨੂੰ ਵੀ ਅਸਲੀ ਅਰਥ ਨਹੀਂ ਪਤਾ ਇਸ ਪੰਕਤੀ ਦੇ ਹਾਂ ਜੀ ਹਾਂ ਹਾਂ ਉਹਨਾਂ ਨੂੰ ਸਮਝ ਨਹੀਂ ਆ ਠੀਕ ਹੈ ਉਹਨਾਂ ਨੂੰ ਸਮਝ ਤਾਂ ਆਈ ਹੈ ਪਰ ਬੁੱਝ ਨਹੀਂ ਹੋਈ ਉਹਨਾਂ ਤੋਂ ਹੈ ਠੀਕ ਕੀ ਆ ਉਹ ਨਹੀਂ ਪਤਾ ਹਾਂਜੀ ਮੂਹ ਤਨ ਪ੍ਰੇਮ ਅਥਾ ਪੱਛਣ ਕੁ ਸੱਚਾ ਤਣੀ ਉਹ ਤਨ ਪ੍ਰੇਮ ਅਥਾ ਮੇਰੇ ਫੇਲ ਦੇ ਵਿੱਚ ਤਾਂ ਅਥਾ ਪ੍ਰੇਮ ਸੱਚਾ ਧੜੀ ਹੈ ਜਿਹੜਾ ਜਿਹਦੇ ਤੇ ਪੜਦਾ ਕੋਈ ਨਹੀਂ ਉਹਨੂੰ ਪਰਸਣਦਾ ਉਹਦੇ ਨਾਲ ਸਪਰਸ਼ ਕਰਨਦਾ ਉਹਦੇ ਨਾਲ ਮਹਿਲ ਕਰਨਦਾ ਹੁਣ ਜਿੰਨਾ ਚਿਰ ਪੜਦਾ ਚਾਹੇ ਮੇਰੇ ਤੇ ਆ ਚਾਹੇ ਉਹਦੇ ਤੇ ਵਿਚਾਰੇ ਪੜਦਾ ਬੇਲ ਨਹੀਂ ਹੋ ਮੇਰੀ ਅਕਲ ਤੇ ਪੜਦਾ ਧਰਮ ਦਾ ਬੇਲ ਨਹੀਂ ਹੋ ਸਕਦਾ ਤਨ ਪਰ ਕਾ ਇੱਕ ਸੰਗੀ ਕਿ ਤੁਹਾੰਦੇ ਪੀਤ ਕਰਾਣੀ ਹੋਂਵੇਂ ਦੀ ਪ੍ਰੀਤ ਹੈ ਜਿਹੜੀ ਹੁਣ ਅੜਗੇ ਵੀਦਾਂ ਲਈ ਜਈ ਕਿਸੇ ਤਰੀਕੇ ਨਾਲ ਸਾ ਉਸਨਿਆ ਤੁਹਾਨੂੰ ਥੋੜੇ ਬਹੁਤੇ ਠੀਕ ਕਰਕੇ ਬੰਦ ਲਈਏ ਸਪਰਸ਼ ਕਿੱਥੋਂ ਹੋਣਾ ਤੁਸੀਂ ਤਾਂ ਇੱਕ ਇੱਕ ਹੱਤ ਕ ਵੀ ਜੇ ਇਹ ਅਸੀਂ ਬੰਦ ਲਿਆ ਤਾਂ ਹੱਤ ਕ ਪ੍ਰੈਸਟੀਜ ਬਣਾ ਲਿਆ ਗਿਆਨ ਕਦੇ ਪ੍ਰੈਸਟੀਜ ਜਿਹਨੇ ਬਣਾਇਆ ਉਹ ਮੂਰਖਾ ਦਾ ਮੂਰਖ ਹੁੰਦਾ ਗਿਆਨ ਪ੍ਰੈਸਟੀਜ ਦੀ ਖੋਜ ਪ੍ਰੈਸਟੀਜ ਦੀ ਨਹੀਂ ਇਹ ਗੱਲ ਤਾਂ ਉਹ ਕਹਿੰਦੇ ਆ ਵੀ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕਿਹਾ ਸੀ ਵੀ ਇਹ ਅਰਥ ਪੱਕੇ ਨਹੀਂ ਹੈ ਇਹ ਤਾਂ ਅੱਗੇ ਵਧਾ ਸਕਦੇ ਹੋ ਪਰ ਉਹਨਾਂ ਨੂੰ ਵਧਾਉਂਦਾ ਕੋਈ ਨਹੀਂ ਹੈ ਅੱਗੇ ਕੋਈ ਗੱਲ ਹੋਈ ਨਾ ਪ੍ਰੈਸਟਿਸ਼ੂ ਹਾਂਜੀ ਸੱਚਾ ਤਣੀ ਸੱਚੇ ਤਣੀ ਦੀ ਦਰਸ਼ਨ ਵਾਸਤੇ ਮੈਨੂੰ ਤਾਂ ਪ੍ਰੇਮ ਹੁਣ ਪ੍ਰੇਮ ਜੇ ਹੋਵੇ ਫਿਰ ਲੰਘ ਜਾਣ ਛਾਲਾ ਮਾਰ ਕੇ ਜਿਹਨੂੰ ਪ੍ਰੇਮ ਜਾ ਕੋ ਸਭ ਕੁਝ ਛੱਡ ਜੂਗਾ ਬਈ ਉਹ ਕਿਹਾ ਯਾਰ ਫਰੇ ਇਹ ਚੁੱਕੀ ਜਿਹੜੀ ਆ ਨਾ ਉਹ ਮੈਨੂੰ ਤੇ ਆਗੋ ਪਰੇ ਗੁਰੂ ਦੇ ਜੜੋ ਗੁਰੂ ਵਾਲੇ ਬਣੂ ਹਾਂਜੀ ਫੌੜੀ ਨਿਰਪਉ ਨਾਮ ਵਿਸਾਰਿਆ ਨਾਲ ਮਾਇਆ ਰੱਚਾ ਆਵੇ ਜਾਏ ਪਵਾਈਂ ਬਹੁ ਜੋਨੀ ਨੱਚਾ ਕਪੜੇ ਉਹ ਨਿਰਪਉ ਨਾਮ ਹੈ ਨਾਮ ਤਾਂ ਨਿਰਪਉ ਕਰ ਦਿੰਦਾ ਹੈ ਮੁਕਤ ਕਰ ਦਿੰਦਾ ਉਹ ਵਿਸਾਰ ਛੱਡਿਆ ਨਾਲ ਮਾਇਆ ਬੱਚਾ ਮਾਇਆ ਦੇ ਕਰਕੇ ਆ ਤੁਹਾਡੇ ਅੰਦਰ ਜਿਹੜੀਆਂ ਕ੍ਰਿਸ਼ਨ ਹੈਗੀ ਐ ਆਂਦੇ ਹਾਲ ਤੇ ਸਰਦੇ ਹਾਂ ਨਾਲ ਮਾਇਆ ਰਚਾ ਰਚਣਾ ਔਰ ਮਚਣਾ ਹੈ ਮਾਇਆ ਅਗਨ ਮਾਇਆ ਅਦਨ ਸਭ ਇੱਕੋ ਜਿਹੀ ਮਾਇਆ ਨਾਲ ਰਚਣਾ ਔਰ ਮਾਇਆ ਦੇ ਵਿੱਚ ਮਚਣਾ ਗੱਲ ਇੱਕੋ ਹੀ ਆ ਉੱਥੇ ਭੁੱਲ ਜਾਈਏ ਠੀਕ ਹੈ ਜਿਹੜਾ ਚੀਜ਼ ਨੂੰ ਉੱਥੇ ਉਹਨੂੰ ਆ ਦੇ ਵਿੱਚ ਰਚਾ ਦਈਏ ਫਿਰ ਉਹਦਾ ਹਾਲ ਦੇਖ ਲੋ ਕੀ ਹੋਊ ਹਾਂਜੀ ਆਵੇ ਜਾਏ ਭਵਾਈਆਂ ਬਹੁ ਜੋਨੀ ਨੱਚਾ ਬਸੇ ਆਉਣ ਜਾਣ ਦੇ ਪਿਆ ਹੋਇਆ ਜੋਦੀਆਂ ਧਾਰਨ ਤੇ ਲੱਗਾ ਹੋਇਆ ਉਹਨਾਂ ਚ ਜੰਮਲ ਬਲ ਜਪਿਆ ਰਹੂਗਾ ਬਹੁਤ ਜੋਦੀ ਨੱਚਾ ਬਹੁਤੀ ਜੋਦੀਆਂ ਵਿੱਚੋਂ ਆ ਜਿਹੜਾ ਬਹੁਤ ਜੋਦੀ ਨੱਚਾ ਸੀ ਪਹਿਲਾਂ ਸਾਰੇ ਤਰਮ ਬੱਤਾਂ ਦੇ ਮੁਸਲਮਾਨ ਵੀ ਹਿੰਦੂ ਵੀ ਜੱਲੀਆਂ ਦੁਨੀਆ ਦੀਆਂ ਬੱਤਾਂ ਨੇ ਗੁਰਸਿੱਖ ਨੂੰ ਇੱਥੇ ਕੱਢਿਆ ਸੀ ਨਿਕਲਣੂ ਪਿਆਰ ਜਿਹੜਾ ਨਹੀਂ ਹੈਗਾ ਉਹ ਕਿਉਂ ਨਹੀਂ ਹੈਗਾ ਹੁਣ ਆਪਣੇ ਨਜ਼ਰ ਝਾਕੇ ਕਿਸੇ ਨਾਲ ਦੂਏ ਨੂੰ ਦੂਆ ਕਹਿਣ ਦੀ ਵੈਸ ਕਰਦੀ ਲੋੜ ਨਹੀਂ आवे जाए पवाई है वो जोड़ी बच्चा अच्छा दोहे पक्तियां ही काफी दे सिखवान वास्ते अपने अंदर चाकण वास्ते भी मैं करना नहीं करना नहीं करना मजी ताडी जी वचन करे त खिसक जाए बोले सब कच्चा अंदरों थोथा कूड़ियार कूड़ी सब खच्चा वचन करे त खिसक जाए ਜੇ ਵਜਨ ਕਰ ਲਵੇ ਉਹ ਤਾਂ ਖਿਸਕ ਜਵੇ ਵਜਨ ਤਾਂ ਗੁਰੂ ਨੂੰ ਕਹੇ ਤਾਂ ਸਿਰ ਦੇ ਤਾ ਦੇਤਾ ਬਸ ਗਿਆ ਬਣ ਗਿਆ ਸਿੱਖੀ ਲੈਣੇ ਆਂ ਪਰ ਮਤ ਭੰਡ ਜਾਵੇ ਜੇ ਫੇਰ ਪਿਛੇ ਨੂੰ ਖਿਸਕੇ ਉੱਥੋਂ ਫੇਰ ਬੋਲੇ ਸਭ ਕੱਚਾ ਫੇਰ ਉਹ ਕੱਚਾ ਕੱਚ ਬੋਲਦਾ ਫੇਰ ਉਹ ਸੱਚ ਨਹੀਂ ਬੋਲ ਸਕਦਾ ਕੋਈ ਤਾਂ ਪੜਨਾ ਤਾਂ ਫੇਰ ਮੇਕਣ ਗਿਆ ਤੋਂ ਫੇਰ ਨਹੀਂ ਦੁੱਧ ਰਿਆ ਅੰਦਰੋ ਕੂੜਿਆਰ ਆਇਆ ਫਿਰ ਗੁਰਬਾਣੀ ਦੀ ਦੀ ਅਸੀਂ ਤਾਂ ਇਹ ਲਾਫ ਦੇ ਕਹਿੰਦੇ ਕੌੜੇ ਲਾਫ ਦਿੰਦੇ ਪਰ ਗੁਰਬਾਣੀ ਮੰਨਦੀ ਅਸਰੋ ਥੋਥਾ ਕੂੜਿਆਰ ਮਾਇਆ ਨਾਲ ਪ੍ਰੇਮ ਅ ਕੂੜੀ ਸਭ ਖੱਚਾ ਸਭ ਕੋੜ ਚ ਖੱਚਤ ਹੋਇਆ ਹੋਇਆ ਮਾਇਆ ਚ ਖੱਚਤ ਹਾਂਜੀ ਵੈਰ ਕਰੇ ਨਿਰਵੈਰ ਨਾਲ ਝੂਠੇ ਲਾ ਮਾਰਿਆ ਸੱਚੇ ਪਾਤਸ਼ਾਹ ਵੇਖ ਤੁਰ ਕਰ ਮੱਛਾ ਆ ਤਾਂ ਬਹੁਤ ਅਗਲੀ ਉਹ ਗੱਲ ਕਹਤੀ ਉਹ ਜਿਹੜੇ ਨਿਰਵੈਰ ਗੁਰਬਾਨੀ ਨੂੰ ਅਰਥਾਉਂਦੇ ਨੇ ਸਹੀ ਰੂਪ ਦੇ ਨਾਲ ਵੰਡ ਕਰਨ ਲੱਗ ਜਾਂਦੇ ਸਨ ਕਰਦੇ ਸੀ ਹੁਣ ਵੀ ਕਰਦੇ ਨੇ ਵੈਰ ਕਰੇ ਨਿਰਵੈਰ ਨਾਲ ਇਟਸਾਲਾਲੇ ਵੀ ਕਰਦੇ ਨੇ ਅੰਦਰੋਂ ਉਹ ਗੁਰੂ ਦੇ ਆ ਦੇਖ ਲਓ ਕੀ ਕਿਹਾ ਹੋਇਆ ਕੁਝ ਤਾਂ ਗੁਰੂ ਦਾ ਖੌਫ ਖਾਓ ਵੈਲ ਕਰੇ ਨਿਰਵੈਲ ਨਾਲ ਝੂਠੇ ਲਾਲਚਾ ਕਾਲੇ ਵਾਸਤੇ ਸਿਰਫ ਝੂਠੇ ਲਾਲਚ ਵਾਸਤੇ ਕੁਛ ਨਹੀਂ ਕਰਨਾ ਮਾਰਿਆ ਸੱਚੇ ਪਾਤਸ਼ਾਹ ਉਹ ਤਾਂ ਮਾਰਿਆ ਹੋਇਆ ਸੱਚੇ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਦੇ ਇੱਧ ਪਿਆਰੇ ਬਣੇ ਹੋਇਓ ਤੁਸੀਂ ਬਾਣੇ ਪਾਈ ਫਿਰਦੇ ਹੋ ਆ ਲਿਖਿਆ ਹੋਇਆ ਕੀ ਹੈ ਗੁਰਬਾਣੀ ਕਹਿੰਦੀ ਆ ਮਾਰਿਆ ਸੱਚੇ ਪਾਤਸ਼ਾਹ ਤੁਰ ਕਰਮੱਚ ਤੁਰ ਤੁਰ ਤੋ ਦਰਗਾਹ ਚੋਂ ਹੀ ਜਿਹੜਾ ਕਰਮ ਹੈ ਤੇ ਮਾਰ ਪਣੀ ਏ ਹਕਾਰ ਐ ਹੋਂਦੇ ਦੇ ਉਤੇ ਘਾਰ ਪਣੀ ਜਮਦੂਤੀ ਹੈ 헤ਰੀਆ ਦੁਖ ਹੀ ਮੈਂ ਪੱਛਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਜਿਵੇਂ ਆਪਾਂ ਸ਼ਿਕਾਰ ਖੇਡਦੇ ਹਾਂ ਤੇ ਸ਼ਿਕਾਰ ਆਪਾਂ ਨੇ ਦੇਖ ਲਿਆ ਦੇਖ ਲਿਆ ਜਾਂ ਸ਼ਿਕਾਰ ਦੇਖ ਗਿਆ ਤਾਂ ਘਰ ਵੀ ਗਿਆ ਉਹ ਜਮਦੂਤਾ ਨੇ ਦੇਖ ਲਿਆ ਉਹਨੂੰ ਜਮਦੂਤਾ ਨੇ ਨਿਗਾਹ ਚਾਹਣੋ ਦੁਖੀ ਮੈਂ ਪੱਛਾ ਤਾਂ ਦੁੱਖ ਦੇ ਵਿੱਚ ਫਸ ਕੇ ਮਰ ਜਾਂਦੇ ਦੁੱਖ ਦੇ ਇਹਦੇ ਮਾਲ ਨਾਲ ਜਬੂਤਾ ਦੇ ਨੂੰ ਸੁਖੀ ਨਹੀਂ ਹੋ ਸਕਦਾ ਉਹਨੇ ਸੁਖ ਇਹਨੂੰ ਮਿਲਣਾ ਹੀ ਨੀ ਹੈ ਹੋ ਤਪਾਸ ਧਰਮ ਦਾ ਨਾਨਕ ਦਰ ਸੱਚਾ ਜੇ ਤਪਾ ਹੈ ਨਾ ਤਰਫ ਦਾ ਤਪ ਜਿਹਨੇ ਬਰਨੂ ਤਾਇਆ ਭਰੂ ਛੋ ਸੋਦੇ ਆਪਣੇ ਸ਼ੁੱਧ ਕੀਤਾ ਕੋਠਾਲੀ ਚ ਪਾ ਕੇ ਖੋਟ ਕੱਢੀ ਹੈ ਧਰਮ ਦਾ ਸੱਚ ਦਾ ਨਾਨਕ ਦਾ ਅਰਥ ਸੱਚਾ ਨਾਲਿਕਾ ਉਹਦੇ ਦਰਤੇ ਹੋਈ ਸੱਚਾ ਜਿਹਨੇ ਆਪਣਾ ਮਨ ਸੋਧਿਆ ਮਨ ਸਾਦੇ ਸਿੱਧ ਹੋਇਆ ਕਾਪਾ ਕਬੀਰ ਜੀ ਰੋਟੀ ਕਹਿੰਨੇ ਰੋਟੀ ਦਾ ਕੀ ਭਾਵੇਂ ਜੀ ਰੋਟੀ ਕਾਰਨ ਸਾਰੇ ਿਤਰੇ ਫੇਰ ਦੇਖਦੇ ਢੂੰਢਦੇ ਫਿਰਦੇ ਨੇ ਢੂੰਡਣਾ ਅੱਛਾ ਹੀਰਾ ਢੂੰਡਣਾ ਹੁੰਦਾ ਜੀ ਰੋਟੀ ਕਹਿੰਦੇ ਨੇ ਪੱਕੀ ਬਾਣੀ ਨੂੰ ਅੱਛਾ ਜੀ ਹੀਰਾ ਰੋਟੀ ਕਰਨੇ ਗਲਾ ਘਟਾਵੇ ਕੌਣ ਉੱਥੇ ਭਾਵੇਂ ਇਹ ਤਾਂ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਰੜਾ ਕਰਾਉਣਾ ਪੈਂਦਾ ਬਰਦ ਕਬੂਲ ਕਰਨਾ ਪੈਂਦਾ ਔਖੀ ਜਿਹੜੀ ਐ ਇਥਾਲ ਖਿਚੜੀ ਹੁੰਦਾ ਖੂਬ ਖਾਣਾ ਖਿਚੜੀ ਜਾਂਦੇ ਵਰਤ ਲੋੜ ਉਹ ਲੋੜ ਵਰਤਦਾ ਸਵਾਦ ਲੱਗ ਕੇ ਠਾਕੀਆਂ ਬਣਾਈਆਂ ਹੋ ਜਾਂਦੇ ਉਹ ਹਾਂਜੀ ਇੱਥੇ 15ਵੀਂ ਪੌੜੀ ਦੀ ਸਮਾਪਤੀ ਹੈ ਜੀ